ਰਾਜਨ ਰਾਮ ਰਵੈ हितकार रण में लूजे मनुवा मार राजन राम रवे हितकार राजन ਰਾਮ ने रवे हितरे तो जय अच्छा हितकारी है रण नापू रण में लूजे मनुवा मार बल दे जिन ਜਿਹਾ ਕੇ RAM JI ਬਸ ਸਤਿਗੁਰ ਆ ਤੇਰੇ ਹਿਤ ਵਿੱਚ ਹੈ। ਇਹ ਰਾਜਨ ਮੰਨੂ ਗਿਆ ਜੀ। ਵਾਹ ਰਾਜਨ RAM ਰਵੈ ਹਿਤਕਾਰ ਇਹਦਾ ਮਤਲਬ ਮੰਨੂ ਗਿਆ ਤੋ ਚਿੱਤ ਦੇ ਨਾਲ ਰਹੇ ਤੇਰੇ ਹਿਤ ਵਿੱਚ ਹੈ ਮਾਰ ਇਸ ਤਰ੍ਹਾਂ ਦੀ ਲੜਾਈ ਲੜ ਗਈ ਮਨ ਜਿਹੜਾ ਮਾਰਿਆ ਜਾਵੇ ਰਾਤ ਦਿਨਤ रह रंग राता तीन भवन युग चारै जात हां एतली कहन है हमने आता रहे आठ पैर अच्छा जी ये सर शब्द बच्चा जोड़े रहे तीन भवन चले युग जाण लंदा फिर हो एदा मरो तन्वे जो बच्चे आ ਹਾਂ ਉਹ ਬਦੈ ਨੰਮੀ ਜੁੜਿਆ ਹੋਇਆ ਤੈਨੂੰ ਪਵਨ ਚਾਰਜ ਹੁੰਦਾ ਹੈ ਅੱਛਾ ਜੀ ਉਹ ਵੱਲ ਤਲੇ ਹੈ ਜੀ ਪਰ ਸਾਡੇ ਤਾਂ 30 ਸਾਲ ਉਹ ਨਹੀਂ ਬੈਠੇ ਹਾਂ ਗੁਰਬਾਣੀ ਉਹਨੂੰ ਰੱਦ ਕਰਦੀ ਹੈ ਕੁਰਬਾਨੀ ਦਾ ਮੈਲ ਕਿੱਥੇ ਹੈ ਉਹਦੇ ਨਾਲ ਉਹ ਤਾਂ ਬਾਤ जिन जाता सो ही जेहा अत निर्माइल सी देहा जिन जाता यदि आप लोग बोल जान लेओ आपन बोल भर गए हो जाता ठीक है सो तेसी जेहा आप तद बया ला त हो जाती ਅਜੀਜ਼ ਜੀ ਅਸਰੀ ਬੁੱਧੀ ਸੁਣਦੀ ਹੋਈ ਦੀਏਗੀ ਹਾਂ ਕੋਈ ਹੋਰ ਜੱਲਦਾ ਦੀ ਉਦੀ ਕੋਈ ਪਰ ਦੇ ਤਾਂ ਠੀਕ ਹੈ ਜੀ ਹਾਂ ਹਾਂ ਜੀ ਰਹਿਸੀ RAM ਹਿਰਦੈ ਇੱਕ ਭਾਏ ਅੰਤਰ ਸ਼ਬਦ ਸਾਚ ਲਿਵ ਲਾਏ ਭਾਏ ਦੇ ਵਿੱਚ ਇਕੋ ਜੀ ਭੁੱਖ ਨੂੰ ਦੀ ਰੋਗ ਦੀ ਦੀ ਜੇ ਗੁੜੀ ਦੇ ਦੀ। ਹਾਂ ਜੀ। ਲਾਜ਼ੀਰ ਅੰਤਰ ਸ਼ਬਦ ਸਾਚ ਲਿਖ ਲਾਏ। ਉੱਤਰ ਸ਼ਬਦ ਹੁੰਦਾ 10000। ਸਾਚ ਇਹ ਇੱਕ guys... <laughs> mm -hmm.